श्लोक महला 5वां हर एक से नाल मैं दोस्ती हर एक से नाल मैं रंग एक में ना, इक कड़ -कड़ में हर इक ओ मेरा सजनो हर इक से नाल मैं संग हर है नहीं कफर सबदे अंदर है कट कट बन केवल ओ सार नाल है हर इक सै केवल इक मैं दोस्ती मेरी दोस्ती है ਮੇਰੇ ਅੰਦਰ ਜੀ ਸੱਚੀ ਦੋਸਤੀ ਉਹਦੇ ਬਾਅਦ ਸੱਚਾ ਪ੍ਰੇਮ ਹੈ ਉਹ ਤਾਂ ਸੱਤ ਸਿਰੂ ਪਰਈ ਉਹਦੇ ਨਾਲ ਹੈ ਹੀ ਨਹੀਂ ਉਹਦੇ ਨਾਲ ਜਿਹੜਾ ਮੇਰਾ ਪ੍ਰੇਮ ਹੈ ਉਹ ਬਲੀਦ ਪ੍ਰੇਮ ਨਹੀਂ ਹੈ ਪਾਇਆ ਦੀ ਕੋਈ ਭੁੱਖ ਵਾਸਤੇ ਪ੍ਰੇਮ ਨਹੀਂ ਹੈ ਉਹਦੇ ਚਲਣਾ ਚ ਰਹਿਣ ਦਾ ਹੀ ਪ੍ਰੇਮ ਹੈ ਉਹਦੀ ਸੰਗਤ ਕਰਨ ਦਾ ਹੀ ਕਰਨ ਦੀ ਕਰਦੇ ਰਹਿਣ ਦੀ ਉਹ ਭੁੱਖ ਹੈ ਪਰ ਪ੍ਰੇਮ ਹੈ ਨਾ ਉਹਦੇ ਵਿੱਚ ਜਿਹੜੀ ਡਿਮੋਰਡ ਹੈ ਉਹਦੇ ਚਰਣਾ ਤੇ ਉਸ ਪਰਛਾਹ ਹਰ ਵਕਤ ਮਿਲਦਾ ਰਹੇ ਇਹੀ ਭੁੱਖ ਹੈ ਇਹੀ ਰੰਗ ਹੈ ਵੀਰੇ ਅੰਦਰ ਹਾਂਜੀ ਹਰ ਇੱਕ ਉਹ ਮੇਰਾ ਸੱਜਣੋ ਹਰ ਇੱਕ ਸੇ ਨਾਲ ਮੈਂ ਸੰਗ ਫਸੋ ਇੱਕੋ ਹੀ ਮੇਰਾ ਸੱਜਣਾ ਜਾਂ ਮੈਂ ਜਾਣਾ ਹੈ ਸ੍ਰੀ ਛੱਲੋ ਨਹੀਂ ਇੱਕ ਤਾਂ ਸੱਜਣੋ ਹਰ ਇੱਕ ਸੇ ਨਾਲ ਮੈਂ ਸੰਗ ਉਹਦੇ ਨਾਲ ਹੀ ਮੈਂ ਸੰਕੀਤਾ ਹੋਇਆ ਹੁਣ ਉਹਦੇ ਨਾਲੇ ਸੋਚੀ ਜੁੜੀ ਹੋਈ ਹੈ ਉਹਦੇ ਜੇ ਬੁੱਧੀ ਸਮਾਈ ਰਹਦੀ ਹੈ ਬੁੱਧੀ ਉਹਦੇ ਵਾਸਤੇ ਵਿਚਾਰਦੀ ਹੈ ਉਹਦੇ ਵਾਸਤੇ ਹੀ ਸੋਚਦੀ ਹੈ ਉਹਦੇ ਵਾਸਤੇ ਹੀ ਕੁਝ ਕਰਦੀ ਹੈ ਅਗੇ ਭੁੱਖਾ ਕਿਆ ਖਾਏ ਪਹਲੇ ਜੀਵ ਵਾਸਤੇ ਨਾ ਸੋਚਦੀਆਂ ਨਾ ਕੁਛ ਕਰਦੀਏ ਇਹ ਆਪਣਾ ਹੁੰਦਾ ਰਹਦਾ ਸੰਸਾਰ ਵਾਸਤੇ ਨਾ ਸੋਚਦੀਆਂ ਨਾ ਕੁਛ ਕਰਦੀਏ ਹੈ ਉਹ ਕਰਦੇ ਹਾਂਜੀ ਹਰ ਮੈਲਾ ਕਰੈ ਨਾ ਭੰਗ ਵਿਚਾਰ ਵੀ ਰਹਿੰਦਾ ਗੋਸ਼ਟੇ ਵੀ ਉਹਦੇ ਨਾਲ ਅੰਦਰ ਚਲਦੀ ਰਹਿੰਦੀ ਆ ਮੂੰਹ ਮੈਲਾ ਕਰੈ ਨਾ ਭੰਗ ਨਾ ਤਾਂ ਮੂੰਹ ਮੈਲਾ ਕਰਦਾ ਨਾ ਤਾਂ ਉਹ ਕੋਈ ਐਸੀ ਬਲੀਦ ਗੱਲ ਹੈ ਉਹਦੇ ਵਿਚਾਰਾਂ ਦੇ ਵਿੱਚ ਬਲੀਦ ਚਾਹੂ ਚੌਂਦੀ ਕੋਈ ਕੱਪ ਕਿਸੇ ਨਾਲ ਕੋਈ ਧੋਖੇ ਦੀ ਗੱਲ ਕੋਈ ਔਗਣ ਵਾਲੀ ਗੱਲ ਜਿਹੜੀ ਗੱਲ ਚ ਹੋਵੇ ਦਾਗ ਲੱਗਦਾ ਵਿਚਾਰ ਚਰਚਾ ਦਾ ਵਿਸ਼ਾ ਹੀ ਨਹੀਂ ਹੁੰਦੀ ਉਹ ਮਹਿੜਾ ਨਹੀਂ ਕਰਦਾ ਨਾ ਉਹ ਕੰਮ ਕਰਦਾ ਆਪਣੇ ਲੋਲ ਨੂੰ ਜਿਹਦਾ ਹੌਲ ਰੱਦਾ ਉਹ ਮਹਿੜਾ ਹੁੰਦਾ ਜੇ ਉਹ ਫੇਰ ਲਵੇ ਸੱਚ ਤੋਂ ਉਹ ਫੇਰ ਲਵੇ ਮਾਇਆ ਬੰਦ ਕਰ ਲਵੇ ਉਹ ਝੂਠਾ ਹੋ ਜਾਂਦਾ ਨੂੰ ਫੇਰ ਇਹ ਉਹ ਝੂਠਾ ਸੱਚ ਤੋਂ ਉਹ ਫੇਰ ਲਵੇ ਉਹ ਝੂਠਾ ਹੋ ਜਾਂਦਾ ਪਰ ਭੰਗ ਹੋ ਜਾਂਦਾ ਸੱਚ ਹਾਂਜੀ ਜਾਣ ਵਿਰਥਾ ਜੀ ਕੀ ਕਦੇ ਨਾ ਮੋੜੈ ਰੰਗ ਜੀ ਜੀ ਵਿਰਥਾ ਨੂੰ ਜਾਣਦਾ ਹੈ ਇਸ ਕਰਕੇ ਕਦੇ ਨਾ ਮੋੜੈ ਰੰਗ ਰੰਗਨ ਨੂੰ ਫਿੱਕਾ ਪੈਣੇ ਨਹੀਂ ਦਿੰਦਾ ਉਹ ਵੀ ਛੱਡਦਾ ਗੂੜੇ ਤੇ ਗੂੜੇ ਛੱਡਦਾ ਰੋਜ਼ ਹਾਂ ਜੀ ਹਰ ਇੱਕੋ ਮੇਰਾ ਮਸਲਤੀ ਪੰਨਣ ਕੜਨ ਸਮਰਾਤ ਮੇਰਾ ਮਸਲਤੀ ਕੌਣ ਹੈ ਜਿਹਦੇ ਨਾਲ ਮਸ਼ਵਰਾ ਕਰਦੇ ਉਹ ਹਰ ਇੱਕੋ ਹੀ ਹੈ ਉਸ ਨਾਲ ਮਸ਼ਵਰਾ ਕਰਦੇ ਕੌਣ ਭੱਲਣਾ ਕਰਨਾ ਕੋਈ ਗਲਤ ਫਹਿਮੀ ਨਾ ਤਰਫ ਪ੍ਰਤੀ ਉਹ ਜਦ ਹੀ ਭੱਲ ਦਿੰਦਾ ਦੂਜੀ ਨਵੀਂ ਘੜ ਹੁੰਦਾ ਗਲਤੀ ਨੂੰ ਸੁਧਾਰ ਕਰ ਦਿੰਦਾ ਗਲਤੀ ਨੂੰ ਤੋੜ ਕੇ ਆਹ ਗਲਤ ਹੈ ਆਹ ਸਹੀ ਹੈ ਆਹ ਨਹੀਂ ਕਰਨਾ ਆਹ ਕਰਦੇ ਆਹ ਠੀਕ ਹੈ ਆਹ ਗਲਤ ਹੈ ਠੀਕ ਘੜ ਦਿੰਦਾ ਗਲਤ ਜੋ ਹੁੰਦੀ ਹੈ ਗਲਤੀ ਹੁੰਦੀ ਉਹਨੂੰ ਤੋੜ ਦਿੰਦਾ ਹਾਂਜੀ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆਂ ਜਗ ਹੱਥ ਹਰੇ ਕੋ ਮੇਰਾ ਦਾਤਾਰ ਹੈ ਦਾਤਾਰ ਵੀ ਹੋਈ ਹੈ ਉਹਦੇ ਦਾਤ ਮੰਗੀ ਦੀਏ ਜੋ ਦਾ ਨੇ ਸਾਰ ਤੇ ਉਹਦਾ ਹੀ ਹੱਥ ਹੈ ਉਹਦੀਆਂ ਦਾਤਾਂ ਦਿੱਤੀਆਂ ਹੋਈਆਂ ਜੀ ਗਾਂ ਵਰਤਾ ਰਹੇ ਨੇ ਉਹ ਬੜੇ ਦਾਤੇ ਚਾਹੇ ਹੋ ਸੰਤ ਜਿਹੇ ਚਾਹੇ ਹੋ ਗਿਆਨ ਵਾਲੇ ਚਾਹੇ ਹੋ ਸਾਈਂ ਦਾ ਨੇ ਚਾਹੇ ਹੋ ਰਾਜੇ ਦੇ ਚਾਹੇ ਕੋਈ ਬੜੇ ਸਾਧੂ ਦੇ ਚਾਹੇ ਪੜ੍ਹਾਲੇ ਲਾਉਂਦੇ ਨੇ ਉਹ ਦਾਤਾ ਪਰਮੇਸ਼ਰ ਦੀ ਦਿੱਤੀ ਹੋਈ ਹੈ ਸਾਰੀ ਉਹਨਾਂ ਨੂੰ ਹੀ ਉੱਤੇ ਹੀ ਬੰਗਦੇ ਨੇ ਸਾਰੇ ਹਾਂਜੀ ਹਰ ਇੱਕ ਸਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਤ ਹਰ ਇੱਕ ਸਦੀ ਮੈਂ ਟੇਕ ਹੈ ਉਸਦੀ ਟੇਕ ਹੈ ਮੈਨੂੰ ਉਸਦਾ ਆਸਰਾ ਹੈ ਜੋ ਸਿਰ ਸਭਨਾ ਸਮਰੱਤ ਕਰਾਣ ਚੱਲਦੇ ਉਸ ਤੇ ਸਬਰਤ ਜਿਹੜੀ ਸ਼ੰਤੀ ਕਿਸੇ ਜਬਦੀ ਉਹਦੇ ਵਿੱਚ ਹੈ ਹਾਂਜੀ ਸੰਤ ਮਿਲਾਇਆ ਮਸਤਕ ਧਰ ਕੇ ਸਤਗੁਰ ਨੇ ਐਸਾ ਸੰਤ ਬੰਦਾਇਆ ਮੈਨੂੰ ਸਤਗੁਰ ਦੁਆਰਾ ਐਸਾ ਸੰਤ ਮਿਲਿਆ ਅਸਤੇ ਤੜਕਾਏ ਹੱਥ ਹੱਥ ਚਤੇ ਹੱਥ ਰੱਖਿਆ ਵਾਲੇ ਬਿਰਾਤ ਤਾਂ ਤੇ ਕਰਤਾ ਠੀਕ ਹੈ ਜੀ ਹੋਇਆ ਔਂਕੜ ਤੇ ਇਹ ਫਿਰ ਚਿੱਤ ਵਾਸਤੇ ਜੀ ਹਾਂ ਅੰਤਰਾ ਜਿਹਨੂੰ ਸਤਗੁਰ ਤੇ ਤੇ ਖਾਲੀ ਕੋਈ ਨਹੀਂ ਉਹ ਸਤ ਅੱਛਾ ਜੀ ਸਤਗੁਰ ਸਿਆਰੀ ਨਾਲ ਸਤਗੁਰ ਨੇ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਹਾਂਜੀ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਉਦੋਂ ਬਾਅਦ ਵੱਡਾ ਸਾਹਿਬ ਗੁਰੂ ਬੁਲਾਇਆ ਸ਼ਬਦ ਗੁਰੂ ਬੁਲਾਤਾ ਹੁਕਮੇ ਬੁਲਾਤਾ ਵੱਡਾ ਸਾਹਿਬ ਇੱਕ ਸਾਹਿਬ ਹੈ ਇੱਕ ਵੱਡਾ ਸਾਹਿਬ ਹੈ ਉਦੋਂ ਬਾਅਦ ਫਿਰ ਉੱਥੇ ਹੀ ਖੜਿਆ ਉਦੋਂ ਵੱਡਾ ਸਾਹਿਬ ਬੁਲਾਤਾ ਗੁਰੂ ਮਿਲਾਇਆ ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਦਰਗਾਹ ਦੇ ਵਿੱਚ ਸੰਜੋਗ ਹੋ ਗਿਆ ਜੁੜ ਕੇ ਸ਼ਬਦ ਨਾਲ ਜੁੜ ਗਈ ਸਦਾ ਹੀ ਕਿਆ ਪੂਰੀਆਂ ਹੋ ਗਿਆ ਅਰਿਕ ਕੋ ਕੋਈ ਹੋ ਗਿਆ ਲੀਨ ਹੋ ਗਿਆ ਠੀਕ ਹੈ ਜੀ ਜਿਹੜਾ ਧੁਰ ਦੇ ਨਾਲ ਸ਼ਬਦ ਗੁਰੂ ਹੋ ਗਿਆ ਹੈ ਦਰਗਾਹ ਨਾਲੇ ਇੱਕਮਿਕ ਹੋ ਹੁਕਮ ਨਾਲੇ ਹੁਕਮ ਦੇ ਵਿੱਚ ਲੀਨ ਹੋ ਗਿਆ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੈ ਭੋਗ ਨਾਨਕ ਨੇ ਸੱਚ ਨੂੰ ਪਾਲਿਆ ਪਾਇਆ ਕੀ ਹੈ ਸੰਯੋਗ ਤੋਂ ਸੱਚ ਨੂੰ ਪਾਲਿਆ ਸਦਾ ਹੀ ਭੋਜਨ ਸਦ ਭੋਜਨ ਭੋਗੇ ਭੋਗ ਸਦਾ ਹੀ ਖਾਦਾ ਰਹੋ ਸੱਚ ਸੱਚ ਮਿਲ ਗਿਆ ਸੱਚ ਖਾਣਾ ਸੀ ਸਦਾ ਹੀ ਖਾਂਦੇ ਰਹੋ ਸੱਚ ਮੁਗਦਾ ਹੀ ਜਿੰਨਾ ਮਰਜੀ ਖਾਈ ਜਾਓ ਸੱਚ ਖਾਣਾ ਸੱਚ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਧ ਜਿਹੜੀ ਮਨਮੁੱਖਾਂ ਦੀ ਦੋਸਤੀ ਹੈ ਮਾਇਆ ਕਰਕੇ ਹੁੰਦੀ ਆ ਮਾਇਆ ਕਰਕੇ ਸੰਬੰਧ ਹੈ ਮਾਇਆ ਦੇ ਸੰਬੰਧ ਨੇ ਸਰੀਰਾਂ ਦੇ ਸੰਬੰਧ ਨੇ ਲੈਣ ਦੇਣ ਦੇ ਸੰਬੰਧ ਨੇ ਕਾਇਦਾ ਆਦੇ ਸੰਬੰਧ ਨੇ ਨੌਕਰੀ ਪੇਸ਼ੇ ਦੇ ਸੰਬੰਧ ਨੇ ਇਹ ਮਾਇਆ ਹੀ ਹੈ ਸਭ ਕੁਝ ਦੀਨ ਇਹ ਸੰਬੰਧ ਨੇ ਦੇਖਦੇ ਆਂ ਹੀ ਭੱਜ ਜਾਂ ਉਹਦੇ ਬਿੰਦੇ ਬਿੰਦੇ ਹੀ ਭੱਜ ਜਾਂਦੇ ਨੇ ਕਦੇ ਨਾ ਪਾਣ ਬੰਦ ਬੰਦ ਨਹੀਂ ਪਾਉਂਦੇ ਹੋ ਨਾਲ ਨਹੀਂ ਜੁੜਦੇ ਹਾਂ ਕਦੇ ਵੀ ਆਤਮਾ ਕਰਕੇ ਨਹੀਂ ਜੁੜ ਸਕਦੇ ਉਹ ਤਾਂ ਜਦ ਆਉਂਦੀ ਹੈ ਨਾ ਮੌਤ ਸਭ ਪਰੇ ਪਰੇ ਹੋ ਜਾਂਦੇ ਨੇ ਕੋਈ ਨੇੜੇ ਨਹੀਂ ਆ ਸਕਦਾ ਮੈਸੇ ਵੀ ਨੁਕਸਾਨ ਹੋ ਜਵੇ ਤਾਂ ਭੱਜ ਜੰਨੇ ਹਾਂ ਜੀ। ਉਹ ਤਾਂ ਕੰਮ ਜਾਂਦੇ। ਤਾਂ ਅਸੀਂ ਦੂਰ ਹੋ ਜਾਂਦੇ। ਠੋੜੀ। ਜਿੱਚਰ ਪੈਣਣ ਖਾਂਬਦੇ। ਟਿੱਚਰ ਰੱਖਣ ਗੰਢ। ਜਿੱਤ ਦਿਨ ਨਾ ਹੋਵੇ। ਤੇਤ ਦਿਨ ਬੋਲਣ ਗੰਧ। ਅਜੇ ਨજર ਘਾਨ ਨੂੰ ਦਿੰਦੇ ਰਹੋ। ਖਾਣਾ ਪੀਣਾ ਵਧੀਆ ਮਿਲਦਾ ਉਹਨਾਂ ਨੂੰ। ਉਹਨਾਂ ਚਾਰੇ ਰੱਖਣ ਗੰਢ ਉਹਨਾਂ ਜੇ ਨਾਲ। ਗੰਢ ਰੱਖਦੇ ਨੇ। ਗੁਰੂ ਘਰ ਨਾਲ ਜੁੜੇ ਰਹੇ ਸੀ। ਜਿੱਦਣ ਦੇਖ ਰਿਹਾ ਵੀ ਗੁਰੂ ਘਰ ਕੋਈ ਐਸੀ ਗੱਲ ਹੋ ਗਈ ਸੀ ਕਿਸੇ ਵੇਲੇ ਜਾਂ ਕੋਈ ਐਸਾ ਸਮਾ ਆ ਗਿਆ ਕਹਿੜਾ ਜਿੱਤ ਦਿਨ ਬੋਲਣ ਗੰਦ ਉਹ ਤਾਂ ਗੰਦ ਵੀ ਤਾਂ ਸਿੱਖੇ ਸੀਗੇ ਨਾਲ ਉਸ ਵੇਲੇ ਕਦੇ ਉੱਧਰ ਹੋਗੇ ਕਦੇ ਉੱਧਰ ਹੋਗੇ ਇਸਤੀ ਲਿਖੀ ਹੈ ਲੋਕਾਂ ਨੂੰ ਬਣਾ ਕੇ ਢਾਲ ਆਪਣੀ ਵੀ ਆਪਣਾ ਇਤਿਹਾਸ ਵੀ ਸੱਚ ਹੈ ਇਹ ਦਸਮ ਪਾਤਸ਼ਾਹ ਨਾਲ ਵੀ ਤਾਂ ਉਪਤ 40 ਤੁਸੀਂ ਤਾਂ ਕਹਿੰਦੇ ਸੋ ਸਿੰਘ ਸੀ ਜਿਹੜਾ ਗਿਆ ਸੀ ਆਹ ਗਏ ਤੇ ਜਾਦਾ ਜੀ 40 ਸੀ ਹੋਰ ਜੀ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਦ ਕੂੜਾ ਗੰਡ ਨਾ ਚੱਲਈ ਟਿੱਕੜ ਪੱਥਰ ਬੰਦ ਜੀ ਕੀ ਹੁੰਦਾ ਇਹਦੀ ਉਹਨੂੰ ਪਤਾ ਸਰੀਰ ਦਾ ਪਤਾ ਜੋ ਦੀਨ ਉਹਦਾ ਤਾਂ ਮਾਇਆ ਦਾ ਪਤਾ ਜੀ ਦਾ ਨਹੀਂ ਆਤਮਾ ਬਾਰੇ ਨਹੀਂ ਗਿਆਨ ਮਨਮੁਖ ਅਗਿਆਨੀ ਅੰਧ ਮਨਮੁਖ ਅਗਿਆਨੀ ਅੰਧ ਉਹ ਬਾਲੀ ਅੱਖੀ ਨੇ ਉਦਲੀ ਅੱਖੀ ਹੈ ਕੋੜਾ ਗੰਢ ਨਾਲ ਚੱਲੀ ਆ ਕੋੜ ਦੀ ਗੰਢ ਨਹੀਂ ਚੱਲਦੀ ਆਪ ਦੋਸਤੀ ਹੈ ਨਾ શરીਰਾ ਕਰਕੇ ਇਹ ਨਹੀਂ ਗੰਢ ਚੱਲਦੀ ਹਣ ਚੱਕਰ ਦਾ ਬੰਦ ਵੀ ਹੁੰਦਾ ਪੱਥਰ ਦਾ ਬੰਦ ਵੀ ਜਿਵੇਂ ਚੱਕਰ ਦਾ ਬੰਦ ਲਾਉਦੇ ਨੇ ਚੱਕਰ ਤੋਂ ਵੀ ਪੱਥਰ ਦਾ ਬੰਦ ਜਿਹੜਾ ਬਜ਼ਰੂਤ ਹੁੰਦਾ ਇਹ ਗੱਲ ਹੈ ਜਿਹੜੀ ਦੋਸਤੀ ਹੁੰਦੀ ਹੈ ਐ ਜੀ ਹੁੰਦੀ ਹੈ ਜਿਵੇਂ ਆਪਾਂ ਕਹੀਏ ਨਾ ਵੀ ਪੱਥਰਾਂ ਦਾ ਬੰਧ ਤੇ ਵਿਚਾਲੇ ਆਪਾਂ ਚਿੱਕੜ ਨਾਲ ਕੱਚੀ ਉਹ ਕਰਦੀ ਹੈ ਵੀ ਉਹ ਨਾ ਚੂਨਾ ਨਾ ਲੱਗਿਆ ਹੋਵੇ ਚਿੱਕੜ ਲੱਗਿਆ ਹੋਵੇ ਤਾਂ ਖਰੇ ਜਾਂਦਾ ਫਿਰ ਪ੍ਰੀਤ ਕਹਿੰਦਾ ਨਾ ਉਹ ਕਹਿੰਦਾ ਜੇ ਪੱਥਰ ਦਾ ਬੰਧ ਟੁੱਟ ਜਾਂਦਾ ਹੈ ਤੇਰਾ ਚਿੱਕੜ ਦਾ ਬੰਧ ਕੀ ਕਰੂਗਾ ਇਹਦਾ ਚਿੱਕੜ ਦਾ ਬੰਧ ਨਾ ਇਹ ਸਰੀਰ ਕਰਕੇ ਆਪਣੇ ਕਰਕੇ ਆ ਤੇ ਸਰਵਣਲੇ ਪੀਰੇ ਨੂੰ ਵਸਾ ਪਾਲਣੀ ਪਾਵਕ ਤੇ ਨੇ ਕੀਆ ਮੋਹ ਪਾਗਲ ਨਹੀਂ ਚੱਲਦਾ ਹੁਣ ਦੇਖਾ ਤੇ ਡੂਬੀ ਹੋਲੇ ਇਹ ਚਿੱਕੜ ਦਲਦਲ ਫਸਿਆ ਹੋਇਆ ਬੋਧ ਵਿੱਚ ਫਸਿਆ ਉਹ ਦੰਦਲ ਵਿੱਚ ਫਸਿਆ ਹੈ ਜਿਹੜੇ ਦੋਸਤੀਆਂ ਕਰਦੇ ਨੇ ਪੱਗਾਂ ਬਟਾ ਲੈਂਦੇ ਨੇ ਉਹ ਗੱਲ ਹੋਰ ਹੋ ਜਾਂਦੀ ਹੈ ਪੱਥਰ ਦਾ ਬੰਦ ਹੋ ਜਾਂਦਾ ਉਹ ਟੁੱਟ ਜਾਂਦੀਆਂ ਨੇ ਉਹ ਵੀ ਨਾਲ ਨਹੀਂ ਜਾ ਸਕਦਾ ਜੀਤ ਤਾਂ ਚਾਏ ਕਦੂਏ ਖਾਤਰ ਮਾਰਤਾ ਜਾਂਦੇ ਨੇ ਪਰ ਗਾਹਾਂ ਇਕੱਠੇ ਨਹੀਂ ਜਾਂਦੇ ਇੱਕ ਘਰ ਇਹ ਜਿਹੜੇ ਖਾਲਸਾ ਅਨਛੀਦ ਉਹ ਇੱਕ ਘਰ ਜਾਂਦੇ ਨੇ ਉਹ ਵੀ ਸੱਤੇ ਗਰਮੁੱਖਾ ਨਹੀਂ ਦੋਸਤੀ ਜੇ ਮੌਤ ਤੱਕ ਵੀ ਚਲੀ ਜਾਵੇ ਤਾਂ ਇਕੱਠੇ ਹੀ ਰਹਦੇ ਗਾਣ ਜਾਂਦੇ ਇੱਕ ਦੇ ਪਕਰੇ ਵਖਰੇ ਦੇ ਬੰਦਰ ਨਹੀਂ ਹੁੰਦੇ ਹੋ ਅੱਗੇ ਜਾ ਕੇ ਬਾਪ ਦੀ ਔਲਾਦ ਨਹੀਂ ਹੁੰਦੀ ਅੱਗੇ ਜਾ ਕੇ ਚਿੱਕੜ ਪੱਥਰ ਦੇ ਦੋ ਕਿਸੂ ਦੇ ਬੰਦ ਨੇ ਸਧਾਰਨ ਆਦਮੀ ਦਾ ਬੰਦ ਹੀ ਹੈ ਨਾ ਚਿੱਕੜ ਦਾ ਬੰਦ ਹੈ ਉਹ ਮਾਇਆ ਦਾ ਕਿਲਿਖ ਨਾਲ ਕੁਝ ਖੜੇ ਦੇ ਬੰਦੇ ਕੁਝ ਬੰਦੇ ਪਾਡਵਾ ਨਾਲ ਖੜੇ ਦੇ ਆਂਡਵਾਂ ਵਾਲੇ ਨਾਲ ਸਕਾ ਭਰਾ ਵੀ ਖੜਾ ਹੈ ਜਿਉਂ ਜਾਂਦਾ ਖੜੀ ਛਦੂ ਤੂੰ ਤੇਰੇ ਦਾ ਭਰਾ ਨੰਨ ਵੀ ਹੁਣ ਇੱਧਰ ਖੜਾ ਮੈਂ ਭਰਾ ਹੋਊਗਾ ਤੇ ਪੱਥਰ ਵਰਗਾ ਬੰਦਾਂ ਮੈਂ ਚਟਾਨ 'ਤੇ ਖੜਾ ਜੋੜ ਹੈ ਬੰਦ ਉਹਨੂੰ ਜੋੜ ਹੈ ਉਹਨੂੰ ਤਾਂ ਚਟਾਨ ਵਰਗਾ ਪੱਕਾ ਪਰ ਫਿਰ ਵੀ ਟੁੱਟ ਜਾਂਦਾ ਮਾਇਆ ਦਾ ਜੋੜ ਟੁੱਟ ਜਾਂਦਾ ਨਾਲ ਨਹੀਂ ਜਾਂਦਾ ਸੱਜਣ ਨਹੀਂ ਆਣ ਕਹਿੰਦੇ ਅਸੀਂ ਸੱਜਣ ਵਰਗੇ ਜਿਹੜੇ ਜੋੜ ਨੇ ਉਹ ਵੀ ਸੱਜਣ ਨਹੀਂ ਹੁੰਦੇ ਹਾਂਜੀ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹ ਲਪਟਾਇਆ ਹਾਂ ਹੋਂ ਕਰਪ ਬਿਹੰਦ ਨਾਲੇ ਤਾਂ ਸੰਸਾਰੀ ਲੋਕ ਨੇ ਇਹ ਵੀ ਝੂਠੇ ਨੇ ਇਹਨਾਂ ਦਾ ਵੀ ਇੱਕ ਦੂਜੇ ਨੂੰ ਪ੍ਰੇਮ ਕਰਦੇ ਨੇ ਚਿੱਕੜ ਦੇ ਬਾਡੀ ਨਾਲ ਹੀ ਲਾਏ ਨੇ ਉਹ ਦੂਜੇ ਵੀ ਲਾ ਲੈਂਦੇ ਨੇ ਪਾਰਟੀਆਂ ਦੇ ਵਿੱਚ ਜਿਹੜੇ ਇਕੱਠੇ ਮਰਾਗੇ ਐ ਹੁਗਾਂ ਇਕੱਠੇ ਹੀ ਰੋਹੋਂਗੇ ਉਹ ਇਹਨਾਂ ਦੇ ਵਿੱਚ ਵੀ ਹੈਗੇ ਨੇ ਫੌਜਾਂ 'ਚ ਵੀ ਹੁੰਦੇ ਨੇ ਰਾਜਿਆਂ ਦੇ ਵੀ ਹੁੰਦੇ ਨੇ ਏ ਜਿਹੜੇ ਲੋਕ ਨੇ ਫੱਕੜਾਂ ਦੀ ਸਾਦ ਨਹੀਂ ਉਹ ਜਾਣਦੇ ਜਿਹੜੇ ਫੱਕੜ ਨੇ ਉਹਨਾਂ ਦੇ ਸੱਜਣ ਉਹਦੇ ਦੇ ਫੱਕੜੇ ਸੱਜਣ ਨੇ ਕਿਸੇ ਦੇ ਬਾਕੀ ਨਹੀਂ ਕੋਈ ਕਿਸੇ ਦਾ ਸੱਜਣ ਸੱਜਣ ਨਾਲ ਜਾਂਦੇ ਨੇ ਕਿਉਂਕਿ ਸੱਜਣ ਉਹਨਾਂ ਕੋਲੇ ਹੁੰਦੇ ਨੇ ਫੱਕੜਾਂ ਕੋਲੇ ਫੱਕੜ ਸਭ ਦੇ ਸੱਜਣ ਨੇ ਫੱਕੜਾਂ ਨੂੰ ਕੋਈ ਸੱਜਣ ਮੰਨੇ ਕੋਈ ਨਾ ਉਹ ਫੱਕੜਾਂ ਦੀ ਗੈਰ ਨੂੰ ਲੋਕ ਨਹੀਂ ਜਾਣਦੇ ਤੇਰੀ ਬਣਾਉਂਦੇ ਨੇ ਨਾਲ ਬਣਾਉਂਦੇ ਇਹ ਬੁਜ਼ਾਲੇ ਵੀ ਛੱਡ ਕੇ ਤਾਂ ਜਾਂਦੇ ਨੇ ਅੱਜ ਵੀ ਜਾਂਦੇ ਨੇ ਖੜ ਕੇ ਸ਼ੀਲ ਵੀ ਹੋ ਜਾਂਦੇ ਨੇ ਇਹਨਾਂ ਦੇ ਵੀ ਰਾਜ ਨੇ ਨੇ ਉਹਨਾਂ ਬਾਪੇ ਤਾਂ ਫੱਕੜ ਤੰਦੇ ਪਿੱਟਦੇ ਨੇ ਅੱਛਾ ਜੀ ਜੇ ਫੱਕੜ ਤੱਤਾ ਕਰਦੇ ਨੇ ਧਰਮ ਦਾ ਧਰਮ ਦਾ ਵੀ ਤਾਂ ਤੰਦਾ ਹੁੰਦਾ ਹੈ ਦੇ ਹਿਸਾਬ ਨਾਲ ਤਾਂ ਫੱਕੜ ਤੰਦੇ ਪਿੱਟਦੇ ਨੇ ਫੱਕੜਾਂ ਦਾ ਤੰਦਾ ਹੋਰ ਹੈ ਉਹਨਾਂ ਦਾ ਉਪਦੇਸ਼ ਕਰਦੇ ਨੇ ਉਪਦੇਸ਼ ਕਰਨ ਬਿਟਣਾ ਹੀ ਹੈ ਜਿਹੜਾ ਬਿਟਣਾ ਉਹਨਾਂ ਦੇ ਬੂਰੇ ਅਸੀਂ ਪਾਉਂਦੇ ਹਾਂ ਉਹ ਕਹਿੰਦੇ ਇਹਨਾਂ ਦਾ ਤਾਂ ਤੰਦ ਪਿੱਟਦੇ ਨੇ ਇਹਨਾਂ ਦਾ ਤਾਂ ਰੋਈਦਾ ਹੀ ਇਹ ਕੰਮ ਆ ਤੁਸੀਂ ਆਪਣੇ ਕੰਮ ਲੱਗੇ ਰਹੋ ਉਹ ਨਹੀਂ ਇਹਨੇ ਪਰਵਾਹ ਕਰਦੇ ਦੀ ਮਰਬਾਨੀ ਕੀ ਕਹਿੰਦੀ ਹੈ ਕੀ ਉਪਦੇਸ਼ ਕਰਦੀ ਹੈ ਇਹ ਹਾਂਜੀ ਝੂਠੇ ਮੋਹ ਲਪਟਾਇਆ ਹਾਂ ਹਾਂ ਕਰਤ ਬਿਹੰਦ ਝੂਠੇ ਮੋਹ ਦੇ ਵਿੱਚ ਲਪਟੇ ਹਾਂ ਹਾਂ ਕਰਦੇ ਨੇ ਉਹ ਐਸੇ ਹੀ ਉਮਰ ਲੰਘ ਜਾਂਦੀ ਹੈ ਉਹਨਾਂ ਦੀ ਉਹ ਹਾਂ ਕਰਦੇ ਝੂਠੇ ਮੋਹ ਦੇ ਵਿੱਚ ਸਾਰੀ ਨੁਮਰੇ ਰੰਗੀ ਜਾਂਦੀ ਹੈ ਬਿਹਾ ਜਾਂਦੀ ਹੈ ਬਿਹੰਦ ਬਿਹਾ ਜਾਂਦੀ ਹੈ ਹਾਂਜੀ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇਜਨ ਉਬਰੇ ਜੋ ਸਤਗੁਰ ਸ਼ਰਨ ਪਰੇ ਵੀ ਆਪਣੀ ਕਿਰਪਾ ਕਰੇ ਪਰਮੇਸ਼ਰ ਵੀ ਕਰੇ ਇਹ ਆਪਣੀ ਵੀ ਕਿਰਪਾ ਕਰੇ ਤੋ ਕਿਰਪਾ ਘਟਿਆ ਹੋ ਜਾਣਾ ਆ ਉਹ ਫਿਰ ਤੁਰ ਪੂਰਾ ਕਰਮ ਕਰਦਾ ਉਹ ਅੰਦਰੋਂ ਕਰਮ ਜਿਹੜਾ ਕਰਦਾ ਉਹ ਗੁਰਬਾਣੀ ਦੇ ਅਨਸਾਰ ਕਰਮ ਉਹ ਹੋ ਜਾਂਦੇ ਉਹ ਹੁਕਮ ਜਿਹੜਾ ਹੈ ਨਾ ਤੋਰ ਪੂਰਾ ਕਰਪ ਕੀਰ ਦਾ ਹੁਕਮ ਦੇ ਵਿੱਚ ਚੱਲਦਾ ਪਾਣੀ ਚੱਲਦਾ ਪਾਣੀ ਵਿੱਚ ਚੱਲਣੀ ਕਾ ਤਰਮ ਕਰ ਲੈ ਹਾਂਜੀ ਜਿਨ ਉਹ ਜਨ ਉਭਰੇ ਜੇ ਸਤਗੁਰ ਛੱਡ ਪੜੇ ਉਹ ਸਮਝੋ ਭਵ ਸੰਕਰ ਤੋਂ ਬਾਹਰ ਆ ਗਏ ਜਿਹੜੇ ਸਤਗੁਰ ਦੀ ਛੱਡ ਪੈ ਗਏ ਉੱਪਰ ਕੇ ਬਾਹਰ ਆ ਜਾਂਦੇ ਨੇ ਉਹਨਾਂ ਦੀ ਗੁਦੀ ਹੋਰ ਹੋ ਜਾਂਦੀ ਹੈ ਉਹ ਡੁੱਬੇ ਹੋਏ ਨਹੀਂ ਰਹਿੰਦੇ ਹਾਂਜੀ ਕੋੜੀ जो ਰੱਤੇ ਦੀਦਾਰ ਸੋਈ सच हाक ਜਿੰਨੀ जाता खसम क्यों ਲੱਬੇ ਤੇ खाक? ਖਾਕ ਜਿਹੜੇ ਉਹਦੇ ਦੀਦਾਰ ਨਾਲ ਉਹਦੇ ਰੰਗ ਵਿੱਚ ਰੰਗੇ ਹੋਏ ਨੇ ਸੋਈ ਸੱਚ ਹਾਕ ਕੋਈ ਸੱਚ ਦਾ ਓਕਾ ਦੇ ਰਹੇ ਨੇ ਕੋਈ ਆਗ ਮਾਰਦੇ ਨੇ ਤੁਹਾਨੂੰ ਜਗਾ ਰਹੇ ਸਤਗੁਰ ਜਾਗਤਾ ਹੈ ਜੇ ਗਿੰਦਾ ਜਗਾ ਰਹੇ ਆ ਦੂਜਿਆਂ ਨੂੰ ਵੀ ਤੁਸੀਂ ਵੀ ਜਾਗ ਪੋ ਦੇਖੋ ਜਾਗਦਿਆਂ ਦੀ ਦੁਨੀਆ ਦੇਖੋ ਕੈਸੀ ਹੈ ਇਹ ਸੰਸਾਰ ਨੂੰ ਜਾ ਕੇ ਦੇਖੋ ਸੁਪਨਿਆਂ ਨੂੰ ਦੇਖੋ ਹਾਂਜੀ ਜਿੰਨੀ ਜਾਤਾ ਖਸਮ ਕਿਉ ਜਿਹਨੇ ਖਾਸ ਨੂੰ ਜਾਣ ਲਿਆ ਉਹਨਾਂ ਨੂੰ ਕੀ ਲੋੜ ਹੈ ਕਬਰ ਚ ਜਾਣ ਦੀ ਸਰੀਰ ਰੂਪੀ ਕਬਰ ਚ ਉਹ ਤਾਂ ਜੰਮੇ ਜੰਮੇ ਛੱਡ ਕੇ ਕਬਰ ਚ ਰਹਿਣ ਦੀ ਕੀ ਲੋੜ ਹੈ ਉਹਨੂੰ ਇਹ ਅਗਲੀ ਖਾਕ ਉਹਨਾਂ ਨੂੰ ਲੱਭਦੀ ਅਗਲਾ ਸਰੀਰ ਨਹੀਂ ਬਣਦਾ ਕਹਿਣ ਦਾ ਮਤਲਬ ਹੈ ਕਿਉਂ ਲੱਭੈ ਤਨਾ ਹਾਂ ਅਗਲਾ ਸਰੀਰ ਦੀ ਉਹਨਾਂ ਨੂੰ ਮਿਲਣਾ ਬਿਟੀਦਾ ਅਗਲੇ ਅਗਲੀ ਨਹੀਂ ਉਹਨਾਂ ਦੀ ਥੋੜੀ ਹਾਂਜੀ ਮਨ ਮੈਲਾ ਵਿਕਾਰ ਹੋਵੇ ਸੰਗੀ پاک ਦਿਸੈ ਸੱਚਾ ਮਹਿਲ ਪਾਕ ਪਰਮ ਤਾਕ ਮਨ ਮੈਲਾ ਹੋ ਜਾਂਦਾ ਖੰਦ پاک ਸੰਗੀ پاک ਹੈ ਤੇਰੇ ਨਾਲ ਫਿਰ ਵੀ ਮਨ ਉਹਨੂੰ ਸੰਗੀ ਨੂੰ ਛੱਡ ਕੇ ਮੈਲਾ ਹੋ ਜਾਂਦਾ ਇਹਦੇ ਨਾਲ ਸਾਫ਼ ਚੀਜ਼ ਹੈ ਉਹਦੀ ਸੰਭੁਲ ਛੱਡ ਹੁੰਦਾ ਮਨ ਮੈੜਾ ਬੇਕਾਰ ਹੋਵੇ ਵਿਕਾਰ ਜਿਵੇਂ ਮੈੜਾ ਹੁੰਦਾ ਸੁੰਨੀ ਦਾ ਤੇਰਾ ਪਾਕ ਹੈ ਤੂੰ ਮੈੜਾ ਕਿਉਂ ਨਹੀਂ ਨਾ ਦੋਤਾ ਸੰਗ ਛੱਡ ਕੇ ਮੈੜਾ ਹੁੰਦਾ ਉਹਦੀ ਉਮਰ ਛੱਡ ਕੇ ਮੈੜਾ ਹੁੰਦਾ ਸੱਚਾ ਮਹਿਲ ਖੁੱਲ੍ਹੇ ਪਰਮ ਤਾਕ ਜੇ ਸੱਚਾ ਬੈਲ ਦਾ ਦਰਸ਼ਨ ਸੱਚਾ ਮਹਿਲ ਅੰਦਰ ਦੀਨ ਦਾ ਜਿਹੜਾ ਤਾਕ ਹੈ ਪਰਮ ਦਾ ਪਰਦਾ ਖੁੱਲ ਜਾਂਦਾ ਪਰਮ ਦਾ ਪਰਦਾ ਪਹਿਲਾਂ ਖੁੱਲਦਾ ਫਿਰ ਸੱਚਾ ਮਹਿਲ ਦਿਖਦਾ ਜੀ ਪਰਮ ਦਾ ਪਰਦਾ ਜੇ ਖੁੱਲੂ ਤਾਂ ਹੀ ਬੈਲ ਦਿਖੂ ਕੋ ਖੋਲਦਾ ਕੇ ਮਦਗ ਦੀਵਾ ਬੜਾ ਹਨੇਰਾ ਜਾਏ ਮੈਂ ਪਰਦਾ ਖੁੱਲੇ ਹੋਰ ਦੇਖੇ ਬਰਾਬਰ ਹੀ ਨਹੀਂ ਦੋਏ ਬੁਰਨਾ ਪਹਿਲਾਂ ਦੇਖਣਾ ਪਿਛਲ ਜਿਸੈ ਦਿਖਾਲੇ ਮਹਿਲ ਤਿਸਨਾ ਮਿਲੇ ਤਾਕ ਮੰਤਨ ਹੋਈ ਨਿਹਾਲ ਬਿੰਦਕ ਨਦਰ ਝਾਕ ਜੇ ਮਹਿਲ ਦਿਖਾ ਦਮੇ ਕਿਸੇ ਨਾ ਮਿਲੇ ਤਾਕ ਉਹ ਬਾਲ ਨਹੀਂ ਸਿਰਦੇ ਨੂੰ ਮਹਿਲ ਤੇ ਉਹ ਤਾਂ ਕਾਲੀ ਕਿਸੇ ਨਾਲ ਮਿਲਦਾ ਆਕ ਮਨ ਤਾਂ ਨੋਇ ਨਿਹਾਲ ਬਿੰਦਕ ਨਜ਼ਰ ਆਕ ਬਿੰਦਕ ਦੀ ਨਜ਼ਰ ਇੱਕ ਸਕਿੰਟ ਦੀ ਨਜ਼ਰ ਦੀ ਨਿਹਾਲ ਹੋ ਜਾਂਦਾ ਲੋ ਜੀ ਮੌਨ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਕਿਸੈ ਮਿਲੇ ਸੰਤ ਖਾਕ ਮਸਤਕ ਜਿਸੈ ਭਾਗ ਅਨਮੋਗਿਆ ਮਨੋ ਦੀ ਕੋ ਜਨਾ ਤਦ ਤੈਨੂੰ ਸਿਆਰੀ ਹੈ ਇਹਦੀਆਂ ਰੋਦਿੰਦੀਆਂ ਬਣਾਉਣਗੇ ਜਿੱਦੀ ਵੀ ਇੱਕ ਵਜਨ ਹੈ ਨਾਮ ਵੀ ਇੱਕ ਵਜਨ ਹੈ ਨਿਦਾਨ ਵੀ ਇੱਕ ਵਜਨ ਹੈ ਕਿੰਨੇ ਇੱਕ ਵਜਨ ਦੇ ਠੀਕ ਹੈ ਜੀ ਨਾਮ ਜਿੱਦੀ ਆ ਲੈਣਾ ਨਾਮ ਰੱਖ ਜਾਂਦੇ ਨੇ ਜਿੱਦੀ ਖਜ਼ਾਨਾ ਗੁਰਬਾਣੀ ਚ ਨਾਮ ਦਾ ਗੁਰਕੇ ਸ਼ਬਦ ਲਾ ਗਏ ਗੁਰਕੇ ਸ਼ਬਦ ਨੇ ਇਹੀ ਨਾਮ ਦੇ ਖਜਾਨੇ ਦੇ ਦਵੇ ਗਿਆੰਦਾ ਇਹ ਸ਼ਬਦਾਂ ਨਾਲ ਜੁੜ ਜਾ ਗੁਰਬਾਣੀ ਨਾਲ ਜੁੜ ਜਾ ਇਹਦੇ ਖਜ਼ਾਨਾ ਖਜ਼ਾਨਾ ਸੰਸਾਰ ਜਹੀ ਇਹ ਤੇਰਾ ਕਾਰੀ ਦੀ ਗੱਲ ਹੈ ਕਿਸੇ ਗ੍ਰੰਥੇ ਚ ਨਹੀਂ ਲਿਖੀ ਹੋਈ ਅਰ ਜੀ ਇਸ ਐਵੇਂ ਲੇ ਸੰਤ ਖਾਕ ਮਸਤਕ ਜਿਸੇ ਭਾਗ ਸੰਤ ਕਾ ਕੋ ਨੂੰ ਮਿਲਦੀ ਐ ਸੰਤਾ ਨੇ ਧੂੜ ਉਹਨੂੰ ਮਿਲਦੀ ਐ ਜਿਹਦੇ ਮਸਤਕ ਕੋ ਭਾਗ ਹੋਣ ਪੱਥਰੇ ਦੇ ਭਾਗ ਹੋਣ ਗਿਆਨ ਗੁਰਬਾਣੀ ਦਾ ਇਹ ਜਿਹੜੀ ਧੂੜ ਐ ਸੰਤਾ ਦੀ ਸੰਤ ਜਨ ਬੋਲਦੇ ਨੇ ਇਹੀ ਚੀਜ਼ ਧੂੜਦੇ ਨੇ ਗਿਆਨੇ ਧੂੜਦੇ ਨੇ ਗੁਰਬਾਣੀ ਜਦੋਂ ਚੱਲ ਹੁੰਦੀ ਐ ਤਾਂ ਗਿਆਨੇ ਧੂੜਦੀ ਐ ਉਹ ਜੇ ਜੇ ਸਮਝ ਚਾਉਂਦੇ ਤਾਂ ਗਿਆਨ ਧੂੜਦੀ ਐ ਜੇ ਤੂੰ ਸਮਝਾ ਕੇ ਕਹਿ ਰਿਹਾ ਫੇ ਤਾਂ ਧਿਆਨ ਧੂੜ ਰਹੀ ਐ ਨਹੀਂ ਤਾਂ ਫਿਰ ਗਿਆਨ ਵੀ ਹੋਣਾ ਕਾਵੇ ਗੀਤ ਭੁੱਖੇ ਮੁੱਲਾਂ ਕਰੇ ਵਸੀਤ ਫੇ ਰੋ ਗੱਲ ਹਾਂਜੀ